9 ਖੰਡ ਪ੍ਰithvi ਫਿਰੇ ਚਿਰ ਜੀਵੇ। ਆ 9 ਖੰਡ ਪ੍ਰithvi ਦਾ 9 ਟੋਕੜੇ ਜਿੱਤੇ ਜਨਨ ਨੂੰ ਕੋਲ ਆਪਾਂ ਜਿਨ੍ਹਾਂ ਨੂੰ ਬੁਰਿਆਜ਼ਮ ਕਹਿੰਦੇ ਆ। ਇਹ ਹੋਏ ਨੇ। ਜਿਵੇਂ ਤਾ ਤਰਾ ਸੀਗਾ। ਕੰ ਦਾ ਦਾਸ ਦਾ ਬਾਦ ਇਹ ਤੇ ਗੱਲ ਦੀ ਸਮਝ ਆਉਂਦੀ ਆ ਮਹਾ ਦਾਸ ਤਪੀਸਰ ਉਹਨਾਂ ਦੀ ਕਹੀ ਜਾ ਸਕਦੀ ਇਹ ਗੱਲ ਮਹਾ ਤਪੀਸਰ ਥੀਵੇ ਮਹਾ ਤਪੀਸਰ ਥੀਵੇ ਵਾਹ ਦਾਸੀ ਹੋ ਜਵੇ ਤਪੀਸਰ ਹੋ ਜਵੇ ਜਨਾ ਮਰਜੀ ਅਗਨੀ ਮਾਹੇ ਹੋਮਤ ਪ੍ਰਾਨ ਅਗਰ ਦੇ ਵਿੱਚ ਪ੍ਰਾਣ ਦੇ ਹੋਪ ਕਰ ਦਵੇ ਪ੍ਰਾਣ ਹੁੰਦਾ ਸਾਰੇ ਬੈ ਜਾਂ ਅਗਰ ਦੇ ਵਿੱਚ ਜੀਵਨ ਜੰਗ ਦੇ ਸਰੀਰ ਜੀਵਨ ਜੰਗ ਦਾ ਜਾਣਾ ਹਮਮ ਆਹ ਤਾਂ ਹੀ ਆ ਸਾਰਾ ਕੱਟਦੇ ਥੋੜਾ ਥੋੜਾ ਕੱਟ ਕੇ ਛੱਡ ਦਿੰਦੇ ਸੀ ਇਤਨੇ ਵਾਰ ਹੈ ਬਰ ਭੂਮੀਦਾਨ ਕਾਨਿਕਾ ਆ ਜਿਹੜਾ ਸੁਭਨਾ आसरो अश्व घोड़े हाथी वो भी चार प्रकार दान भी करे बड़े दान माने गए हैं जोली कर्म करे वो आश्रम करे आज जड़ा पेट साफ करते हैं, अंदर साफ करते देना सारा शरीर कोई अंश नहीं रहनु दे अन्न दा फिर शरीर सड जादी ता पराणा योग कर दे रहे वो सांस छूट गया ਨਿਯੋਜ ਕਰਦਾ ਰਹੀ ਟੁੱਟੀ ਆਹ ਵਾਹ ਜੈਨ ਮਾਰਗ ਸੰਜਮ ਅਤਿ ਸਾਧਨ ਜਿਹੜੇ ਕਰਮ ਕਰੇ ਬਹੁ ਅਸਣ ਬਹੁਤਾਰੇ ਆਸਣ ਉਹ ਨਿਯੋਲੀ ਕਰਦਾ ਰਿਹਾ ਹੋਵੇ ਕੱਲਵੇ ਜੈਨ ਮਾਰਗ ਜੈਨ ਮਾਰਗ ਦੇ ਵਿੱਚ ਦਾ ਤਾਲੀ ਹੋ ਜਾਵੇ ਚਾਹੀਏ ਜੈਨ ਮਾਰਗ ਸੰਜਮ डॉक्टर डॉक्टर जेनी होमीस यासी डॉक्टर जेनी होमीस हां जेनी ओ जेनी नेम प्रोजेक्ट का पटर हो का है 14 दो पर हन तो बे बजेला होता इनडा होया ਉਤਾਰ ਜਮਾ ਕੇ ਬਣ ਕੇ ਪੰਦਰਾਂ ਪਚੌਂਕ ਮਾ ਜਿਹੜਾ ਹੁੰਦਾ ਅਰਹੰਤ ਦੇਵਾ ਜਿਹੜੇ ਮਹਾਵੀਰ ਤੋਂ ਲੰਪੀ ਜਮ ਸਕਾਰ ਹੋਏ ਉਹ ਹੂੜਾਲੇ ਨੇ ਉਹਨਾਂ ਨੂੰ ਨਹੀਂ ਤਾਂ ਬਾਦ ਦੇ ਨੇ ਉਤਾਰ ਨੇ ਬਣਾਏ ਹੋਏ ਅਰਹੰਤ ਤਾਂ ਵਿਚਾਇਆ ਤਾਂ ਇਹ ਤਾਂ ਬਣਿਆ ਹੋਇਆ ਆਪਾਂ ਨੇ ਉਹ ਦਾਤਾ ਤਾਂ ਗਨੇ ਹੋਏ ਨੇ ਉਤਾਰ ਉਹ ਇਹਾਂ ਦੇ ਨਕਲ ਹੈ ਫਿਰ ਕਹਾਂ ਪੋਤਾਰੂ ਦੀ। ਪੋਤਾਰੂ ਦੀ ਗਾਹਾਂ ਡਾਊਨ ਹੋਣ ਲੱਗਿਆ ਹੋਇਆ ਹੈ। ਹਾਂ। ਪੋਤਾਰੂ ਦੀ। ਪੋਤਾਰੂ ਨੇ। ਜੈਨ ਮਾਰਗ ਸੰਜਮ ਅਤੇ ਸਾਧਨ। ਹੈ ਨਹੀਂ? ਜੈਨ ਮਾਰਗ ਸੰਜਮ ਅਤੇ ਸਾਧਨ। ਜੈਨ ਮਾਰਗ ਹੈ ਫਿਰ ਸੰਜਮ ਅਤੇ ਸਾਧਨ। ਇਹ ਪ੍ਰਕਾਰ ਦੇ ਸਾਧਨ ਨੇ ਸੰਜਮ ਕੀ ਕਰਦੇ ਨੇ ਜਨਵਾਰ ਕੀ ਨਿਮਕ ਨਿਮਕ ਕਰ ਸਰੀਰ ਘਟਾਵੇ ਕਰਕੇ ਸਰੀਰ ਨੂੰ ਘਟਾਉਂਦੇ ਨੇ ਬਾਹਰ ਕੁੱਟਦੇ ਨੇ ਸਰੀਰ ਤੇ ਤਾਂ ਵੀ ਹੰਕਾਰ ਦੇ ਘਟਾਉਣ ਦਾ ਕਰਦੇ ਕਿਉਂਕਿ ਦੇਖੋ ਨਾ ਉਹ ਗੱਲ ਵਾਲੀ ਗੱਲ ਆ ਗਈ ਨਾ ਹੰਕਾਰ ਰਾਸ ਹੈ ਹੰਕਾਰ ਨੂੰ ਡਾਰਗਰ ਕਰਦੇ ਇਹਨਾਂ ਨੇ ਵੀ ਇਹ ਕਰ ਲਿਆ ਸੀ ਲਾਸਟ ਵਾਲੇ ਰਾਜੇ ਨੂੰ ਟਾਰਗੇਟ ਕਰੀ ਇੱਕ ਜਿਹੜਾ ਘਟਾਉਂਦੇ ਆ ਨਾ ਇੱਕ ਪੂਰੇ ਤੇ ਅੱਡੇ ਮਾਰੋ ਬੇ ਘੋੜਿਆਂ 'ਤੇ ਮਾਰੋ ਫਿਰ ਆਹ ਹਾਥੀਆਂ 'ਤੇ ਮਾਰੋ ਫਿਰ ਅਧਾਰੇ ਮਾਰੋ ਫਿਰ ਬਹਾਮਾਰੋ ਕਿਲੇ ਵਾਲੇ ਨੂੰ ਭੜੋ ਉਹ ਸ਼ਤਰੰਜੀ ਟਾਰਗੇਟ ਦਾ ਟਾਰਗੇਟ ਬਣਾ ਦੇਣਾ ਚੀਨਾ ਨੇ ਲੇਕਿਨ ਉਹ ਰਾਜੇ ਦੇ ਪਿੱਛੇ ਜਿਹੜਾ ਬੈਠਾ ਹੈ ਉਹ ਦੇਖਿਆ ਜੀ ਉੱਥੇ ਨਹੀਂ ਪਹੁੰਚੇ ਗੁਰਵੱਦਰਾਂ ਪਰ ਹੁਣ ਉਹ ਟਾਰਗੇਟ ਕੀਤਾ ਹੋਵੇ ਰੂਣੀ ਕੀਤਾ ਹਰ ਕੇ ਨਾਮ ਸੰਸਰਿ ਕ੍ਰਿਸ਼ਨ ਹੈ ਹਰ ਕੇ ਨਾਮ ਸਭ ਦਸਮਾਨੇ ਕੁਛ ਵੀ ਨਹੀਂ ਜੋ ਹੈ ਜੋ ਕੁਛ ਦੱਸਿਆ ਇਹਨਾਂ ਮਤਾਂ ਸੱਚ ਨਾਮੇ ਦਾ ਮਤਜ ਹੈ ਨਹੀਂ ਇਹਨਾਂ ਮਤਜ ਹਰ ਕਾ ਨਾਮ ਹੈ ਜੀ ਹਰ ਕੇ ਦੁਆਰ ਸਤ ਕੁਝ ਨਹੀਂ ਜੋ ਬਤਾ ਹਰ ਕੇ ਨਾਮ ਦੀ ਗੱਲ ਨਹੀਂ ਕਰਦੀਆਂ ਮਤਾਂ ਬਸ ਕੁਝ ਜਦੈ ਤੇ ਸਾਹਫੇ ਕਹਤਾ ਇਹਨਾਂ ਮਤਾਂ ਉਲੀ ਉੱਠੜਿਆ ਸਾਡਾ ਪਿਛਵਾਸ ਸੋ ਕਿਹਲੇ ਕਹਿਣਗੇ ਸਾਰਿਆਂ ਨੂੰ ਪਤਾ ਕੀ ਬਰਾਬਰੇ ਦੇ ਜਿਤ ਕਰੋ ਇਹ ਐ ਉਹ ਐ ਉਹ ਕੀ ਬਿਰੋਣਾ ਹਾਲੀਆ ਦੱਸੇ ਹੁਣ ਉਹਨਾਂ ਦਾ ਤਾਂ ਕੋਈ ਜਾਨ ਹੋਵੇ ਦਾ ਉਹਨਾਂ ਦੇ ਆਪਾਂ ਸਾਰੇ ਤਾਂ ਕੋਈ ਨਹੀਂ ਨੇ ਲੋਕ ਕੋਈ ਨਹੀਂ ਨੇ ਨਾ ਉਹਨਾਂ ਨਾਲੇ ਉਹ ਜਿਹੜੇ ਸਖਨ ਹੋਏ ਜੈਦੀ ਨੇ ਕਈ ਵਾਰ ਜੈਦੀ ਨਾਲੇ ਸੱਦੇ ਵੀ ਹੁੰਦੇ ਨੇ ਬਾਣੀ ਨਾਨਕ ਗੁਰਮੁਖੀ ਨਾਮ ਜਪਤ ਗੱਦੀ ਪਾ ਆਹ ਇਹਨਾਂ ਜੈਨੀਆਂ ਜੋ ਦੁਨੀਆਂ 'ਚ ਸਾਰਿਆਂ 'ਚ ਕੋਈ ਵੀ ਹੋਵੇ ਜੇ ਗੁਰਪ੍ਰੀਤ ਨਾਮ ਜਾਪ ਰਵੇ ਤੇ ਸੰਤ ਰਤੀ ਕੋਲ ਆਵੇ। ਫੇਰ ਕੁਤੀਏ ਕੱਢਦੀ ਓਦੀ। ਨਾ। ਕੱਢਣਾ ਕਿਨੇ? ਇਹ ਭਵਨ ਦੇ ਵਿੱਚੋਂ ਭਗਸੰਗਰ ਤੋਂ ਕੱਢਣਾ ਸੀ। ਗੁਰੂ ਕੀ ਨਾਮ ਲੈ ਤੁਵਾ। ਇਹ ਤੁਨੇ ਜਿਕਰਦਾ। ਕਿ ਤੇ ਚੱਕੀ ਜਾਂਦੀ ਹੈ ਉਹ ਬੇਚ ਜਾਂਦੀ ਹੈ ਦਾ ਦਾੜ ਬੜਾ ਕਰੀ ਜਾਂਦੀ ਹੈ